ਸ਼ਲੋਕ ਮਹਲਾ 5ਵਾਂ ਉਸਤਤ ਨੰਦਾ ਨਾਨਕ ਜੀ ਮੈਂ ਹੱਬ ਵਝਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਖ ਕੁੜਾਵੇ ਡਿੱਠੇ ਤੋਂ ਪੱਲੈ ਟੰਡੇ ਲੱਗ ਕਰੇ ਮੈਨੂੰ ਇਹਨਾਂ ਕੋਈ ਮਤਲਬ ਨਹੀਂ ਦੂਰ ਕਰਤੀ ਉਸਤਤ ਦਦਾ ਦੀ ਜਿਹੜੀ ਸੀ ਅੰਦਰੋਂ ਪਟੇਤਾ ਇਹ ਉਸਤਤ ਦਦਾ ਤੋਂ ਚਲੀ ਗਈ ਗੱਲ ਹੁਣ ਜੇ ਸੱਚ ਕਹਣ ਦੇ ਕੋਈ ਮੈਨੂੰ ਬੁਰਾ ਵੀ ਕਹਿੰਦਾ ਮੰਨਦਾ ਤਾਂ ਮੈਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਨਾ ਉਸਤੀ ਕੁੜਾਵੇ ਡਿੱਠੇ ਤੋਂ ਪੱਲੇ ਟੰਡੇ ਲੱਗ ਹੁਣ ਮੈਂ ਚੰਗੇ ਹੁਣ ਮਿੱਠੀ ਲੱਗਦੀ ਸੀ ਉਹ ਮਿੱਠਾ ਲੱਗਦਾ ਸੀ ਪਰ ਹੁਣ ਉਹ ਕੌੜਾ ਲੱਗਦਾ ਉਹ ਤੇ ਸਾਗ ਨੇ ਸਭ ਕੁੜਾਵੇ ਦੇਖ ਲੈ ਮੈਂ ਕੁੜਾਵੇ ਦੇਖ ਉਹ ਤੂੰ ਉਸ ਆਗ ਨਾਲ ਜਾਣ ਵਾਲੇ ਨਹੀਂ ਹੈ ਸੱਚੇ ਨਹੀਂ ਝੂਠੇ ਦੀ ਕੂੜੀ ਦਾ ਨੇ ਨੇ ਸਾਬ ਸਭ ਉਹ ਜਿਹੜਾ ਬਗਾਦਮੀ ਉੱਤੇ ਕਰ ਦੇਣਾ ਤਾਂ ਉਹਦੀ ਰਿਸ਼ਤਾਰੀ ਹੁੰਦੀ ਹੋਈ ਨਹੀਂ ਤੇ ਇਹ ਕਹਿ ਕੌਣ ਰਿਹਾ ਤਾਂ ਪੱਲਾ ਟਾਂਡੇ ਰਹੀ ਹੈ ਕੌਣ ਕਹਿ ਰਿਹਾ ਹੁਣ ਚਿੱਤ ਦੇ ਨਾਲ ਲੱਗੀ ਹੈ ਜੀ ਉਹ ਪਹਿਲਾਂ ਜੀ ਤਾਂ ਬਾਗੀ ਹੋਈ ਸੀ ਉਸੇ ਨੂੰ ਕਹਿੰਦੀ ਹੈ ਹੁਣ ਮੈਂ ਸਾਡੇ ਜਿਹੜੇ ਸੀ ਉਹ ਦੇਖ ਲੈ ਪਲੇ ਬੋਲਣਾ ਜੁੜ ਗਈ ਤਾਂ ਹੋਣ ਨਾਮ ਨਾਮ ਉੱਥੇ ਮਿਲਣਾ ਬੁੱਧੀ ਨੂੰਰ ਕਿ ਤੁਹਾਡੀ ਮਿਲਣਾ ਨਾ ਠੀਕ ਹੈ ਜੀ ਜਦੋਂ ਆਨੰਦ ਕਾਲ ਦੀ ਰਸਮ ਹੁੰਦੀ ਹੈ ਸਿੱਖਾਂ ਵਿੱਚ ਉਹ ਕਹਿੰਦੇ ਸ਼ਬਦ ਹੈ ਜੀ ਇਹ ਵੀ ਫੜਾਉਣ ਤੋਂ ਪਹਿਲਾਂ ਸ਼ਬਦ ਪੜੋ ਇਹਦਾ ਕੋਈ ਇਸ ਤਰ੍ਹਾਂ ਦਾ ਇਸ਼ਾਰਾ ਤਾਂ ਲੱਗਦਾ ਨਹੀਂ ਜੀ ਪਤਾ ਨਹੀਂ ਉਹ ਕਿਉਂ ਬਰਾਬਰ ਕਹਿੰਦੇ ਨਾਲੇ ਪੱਲੇ ਤੇ ਲੱਗੀ ਕਰਦੇ ਨੇ ਸਾਡੇ ਇਹਦਾ ਪਿਛਲੇ ਕਦਮ ਤੇ ਅਸੀਂ ਕੀ ਬੋਲਦੇ ਦੂਜੇ ਕਦਮ ਤੇ ਕੁਝ ਔਲਟ ਬੋਲ ਦਿੰਦੇ ਖੱਬੇ ਪੈਰ ਤੇ ਜਿਹੜਾ ਸਟੈਂਡ ਹੈ ਸੱਚਾ ਜਾਂ ਮੂਰੇ ਆ ਜਾਂਦਾ ਉਹਦੇ ਤੇ ਜਦ ਫਿਰ ਦੁਬਾਰਾ ਖੱਬਾ ਉਹਦੇ ਸਟੈਂਡ ਫਿਰ ਬਦਲ ਦਿੰਦਾ ਬਦਲਦੇ ਨੇ ਗੁਰਬਾਨੀ ਮੈਂ ਕਹਿੰਨੀ ਆ ਵੀ ਇਹ ਪੱਲੇ ਟਾਂਡੇ ਲੱਗੀ ਹੈ ਹੈ ਤਾਂ ਹੀ ਪਿੱਛੇ ਲੱਗ ਕੇ ਲਾਵਾਂ ਲੈਣੀ ਔਰਤ ਨੇ ਹਏ ਉਹ ਸਿੱਧਾ ਹੀ ਆ ਲਿਖਿਆ ਹੋਇਆ ਬੁੱਧੀ ਵੀ ਗਿਆਨ ਦੇ ਲੱਗੂਗੀ ਅੱਗੇ ਕਦੇ ਲੱਗੂਗੀ ਬੁੱਧ ਦੀ ਇਹ ਸ਼ਕਤੀ ਕਹਿੰਦੇ ਲੜੀ ਇਹ ਤਾਂ ਠੀਕ ਹੈ ਇਹਦਾ ਨਿਰਾਕਾਰੀ ਅਰਥ ਹੋ ਨਾ ਜਿਹੜੇ ਲੋਕ ਇਸ ਦੇ ਆਪਣੇ ਮਾਇਆ ਚ ਅਰਥ ਕਰਦੇ ਆ ਉਹ ਕਹਿੰਦੇ ਆ ਕਿ ਹੈ ਕਿ ਔਰਤ ਨੂੰ ਅਸੀਂ ਤਾਂ ਹੀ ਪੰਜ ਪੈਰਾਂ 'ਚ ਨਹੀਂ ਲੈਂਦੇ ਕਿਉਂਕਿ ਪਿੱਛੇ ਚੱਲਣਾ ਮਰਦ ਦੇ ਨਾਲ ਨਹੀਂ ਉਹ ਚੱਲ ਸਕਦੀ ਬਰਾਬਰ ਕਾਹਦੇ ਕਹਿੰਦੇ ਨੇ ਉਹਨਾਂ ਦਾ ਵਿਰੋਧ ਨਹੀਂ ਕਰਦੇ ਜਿਹੜੇ ਬਰਾਬਰ ਕਹਿੰਦੇ ਨੇ ਨਹੀਂ ਕੇ ਬਰਾਬਰੀ ਮੁਖਾਲਫਤ ਕਰਨਾ ਬਰਾਬਰਿਕ ਵੇ ਖੁੱਲ ਤੇ ਕਿਹੜੀ ਕੋਈ ਵੀ ਕਹਣਾ ਕੁਛ ਤੇਰੇ ਬਦੰਤ ਤੇ ਮੰਦਦੇ ਨੇ ਬੱਲੇ ਦੇ ਨਾਲੀ ਵਾਲੇ ਥਾਂ ਆਗੇ ਹੋਰ ਸਟੈਂਡ ਹੈ ਸੋ ਕਿ ਠੀਕ ਹੈ ਤੇ ਜਿਹੜੇ ਸਾਖ ਕੁੜਾਵੇ ਜੇ ਬਾਹਰ ਆਪਾਂ ਦੁਨੀਆ ਚ ਅਰਥ ਕਰੀਏ ਤਾਂ ਇਹ ਸਾਖ ਕੁੜਾਵੇ ਕਿਵੇਂ ਹੋ ਜਾਣਗੇ ਹਾਂਜੀ ਕੁੜਾਵੇ ਹੁੰਦੇ ਹੀ ਨਹੀਂ ਕੋਈ ਵੇੜਾ ਦਾ ਕੋਈ ਮੁੰਡਾ ਬੈਠੇ ਹੁੰਦੇ ਨੇ ਉਹ ਕੁੜੀ ਕਹਿੰਦੀ ਆ ਵੀ ਮਾ ਜਿਹੜੇ ਜਿਹੜੇ ਪਹਿਲੇ ਸਾਥ ਸੀ ਮਾ ਤੇ ਉਹ ਭੈਣ ਭਾਈ ਰਿਸ਼ਤੇਦਾਰ ਕੋੜੇ ਕੋੜੇ ਦਾ ਲੱਗਦੇ ਨਹੀਂ ਉੱਥੇ ਤਾਂ ਜੁੜਦੀ ਉਹ ਪੱਲੇ ਲੱਗ ਵੀ ਗਈ ਉਹ ਕੋੜੇ ਕਿਤੇ ਹੋਏ ਤੇ ਆਈ ਜਗਾ ਮਰਾ ਨਾ ਇਹ ਚਾਹੁੰਦੇ ਨਹੀਂ ਸੀ ਵੀ ਤੇਰਾ ਵਿਆਹ ਹੋਵੇ ਫਿਰ ਚਲੋ ਬੰਦੇ ਆ ਕੋੜੇ ਕੁੜਾਵੇ ਤੋਂ ਹੁੰਦਾ ਜੀ ਹਾਂ ਕੁੜਾਵੇ ਕੋੜੇ ਹੀ ਆ ਅਤੇ ਝੂਠੇ ਵੀ ਹੋ ਸਕਦਾ ਕੂੜੇ ਤੋਂ ਕੂੜਾ ਆਵੇ ਤੇ ਉਹ ਚਲ ਝੂਠੇ ਹੋ ਗਏ ਚਾਹੇ ਝੂਠੇ ਹੁਣ ਫੇ ਮੁੜ ਕੇ ਆਉਦੀ ਨਹੀਂ ਇਸ ਕਰਕੇ ਬਾਹਰਲੀ ਦੁਨੀਆ ਜੁੜਦੀਆਂ ਹੀ ਨਹੀਂ ਕੀ ਲੋੜ ਸੀ ਇਹਨੂੰ ਬਾਹਰ ਪੱਪਾ ਲੈਉਣ ਦੀ ਨਾ ਮੈਂ ਰਜੈਕਟ ਇਹ ਵਿਆਹ ਦੀ ਆ ਮर्यादा ਵਿੱਚ ਜਾਂਦਾ ਕੀ ਕਿ ਜ਼ਰੂਰ ਪੜਦੇ ਹਨ ਸ਼ਲੋਕ ਬਸੰਤ ਰਬੀਉ ਦੇ ਵਿੱਚ ਬਸੰਤ ਰਾਗ ਪੜੀ ਹੀ ਪੜੀ ਜਾਂਦੇ ਨੇ ਉਹਨਾਂ ਦਾ ਕੀ ਹੈ ਕੱਲ ਉੱਤੇ ਕੁਝ ਹੋਰ ਹੈ ਬਾਂਦੀ ਨੂੰ ਦਵਲੀ ਜਾਂਦੇ ਦਾ ਕੀ ਹੈ ਇਹਦਾ ਮੂਰਖਾਂ ਦੇ ਕੋਲ ਨੇ ਹਰ ਜਾਣ ਗਿਆ ਠੀਕ ਹੈ ਜੀ ਇਹ ਜੋ ਸ਼ਲੋਕ ਹੈ ਇਹ ਹੈਗਾ ਦੱਸਿਆ ਹੋਇਆ ਜਿਹੜੀ ਬੁੱਧੀ ਹੈ ਬੇਨਤੀ ਕਰ ਰਹੀ ਹੈ ਕਿ ਉਹਨੂੰ ਸਭ ਜਗ੍ਹਾ ਚਖ ਮਾਰ ਕੇ ਹੋਣਾ ਚਿੱਤ ਨਾਲ ਜੁੜਨ ਦੀ ਮਤ ਆਈ ਹੈ ਜੀ ਕੱਲ ਤਾਂ ਹੈ ਪਰਮਾਰਥ ਦੀ ਭਗਤਾਂ ਦੀ ਜਿਹੜਾਕਾਰ ਜਿਹੜਾਕਾਰੀ ਦੁਨੀਆ ਦੀ ਬਣਾਤੀ ਸਰਦਾਰ ਕੇ ਲਿਆ ਕੇ ਇਹਨਾਂ ਨੇ ਇਹ ਹੁੰਦੀਆਂ ਹੁੰਦੀਆਂ ਨੇ ਜੇ ਚਲੀ ਗਈਆਂ ਸਿੱਖੀ ਦਾ ਵੀ ਬੇੜਾ ਲੋਕ ਇਹਨਾਂ ਨੇ ਸਿਕਿਉਰਿਟੀ ਮੁਕੀ ਚਾਹ ਦ ਸਿੱਖੀ ਉੱਤੇ ਨੂੰ ਉਹ ਇਹ ਗੱਲਾਂ ਨੇ ਅਸ ਬਦਲ ਜਾਣੇ ਸੀ ਇਹਨਾਂ ਦੇ ਅਰਥ ਬਦਲ ਲੈਣੇ ਨਹੀਂ ਹੋਣੀ ਸਿੱਖੀ ਉੱਤੇ ਜਿੱਨਾ ਜਿਹੜੇ ਇਹਨਾਂ ਗੱਲਾਂ ਦੇ ਅਰਥ ਨਹੀਂ ਬਦਲਦੇ ਸੀ ਸਹੀ ਮਹੱਲਾ ਪੰਜਵਾਂ ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਥੀ ਬਹੁਤ ਦੇਸਾਵਰ ਪੰਦਾ ਤਾਂ ਸੁਖੀ ਸੁਖਾਲੀ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਹਾਂ ਜਦ ਤੁਰਦੀ ਫਿਰਦੀ ਉਹ ਫਸ ਗਈ ਤੁਰਦੀ ਫਿਰਦੀ ਉਹ ਕਿਦਾਂ ਸਰਦਦੇ ਠੱਕੇ ਚੜ ਗਈ ਉਹ ਸੰਤਰੀ ਜੈਲੀ ਬਣ ਗਈ ਸੰਤਨ ਆਹ ਬੁੱਲਿਆ ਫਾਏ ਫਸ ਗਈ ਬਹੁਤ ਦੇ ਸਾਵਰੀ ਪੰਦਾ ਬਹੁਤ ਦੇ ਸਾਵਰਾ ਨਾ ਪੰਦਾ ਘਟਿਆ ਬਹੁਤ ਬੁਲਕ ਗਾ ਛਡੇ ਕੀਤੇ ਬੜਾ ਪਰਬਲ ਕੀਤਾ ਕੁਛ ਨੀ ਮਿਲਿਆ ਕਿ ਤੁਮ ਬੜੇ ਬੜਾ ਪੰਦਾ ਮੈਂ ਗਾਹਿਆ ਠੀਕ ਹੈ ਇਹ ਦੁਨੀਆ ਪਰਥੀ ਜੀ ਤਾਂ ਹਾਂ ਸੁਖੀ ਸੁਖਾਲੀ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਤਾਂ ਸੁਖੀ ਸੁਆਲੀ ਸੁੱਤੇ ਕਭ ਜਾ ਗੁਰ ਮਿਲ ਸੱਜਣ ਮੈਂ ਲੱਧਾ ਜਾ ਗੁਰ ਮਿਲ ਸੱਜਣ ਮੈਂ ਲੱਧਾ ਜਦ ਗਿਆਨ ਦੇ ذریعੇ ਪਹਿਲਾਂ ਮੈਨੂੰ ਗਿਆਨ ਪ੍ਰਾਪਤ ਹੋਇਆ ਫਿਰ ਮੈਂ ਆਪਣਾ ਹੰਦ ਟੁੱਟਿਆ ਅੰਦਰ ਮੇਰਾ ਉਹ ਕਹੇ ਨਹੀਂ ਉਹ ਤੇ ਬਿਰਿਆਲੀ ਹੋਰੋਂ ਕਿਦਰ ਕੂਟ ਕੇ ਘਟ ਪੈ ਪਈ ਸੱਤਰ ਕੀ ਭੀੜ ਤੁਲਸੀ ਦਾ ਚਦਰਨ ਕੇ ਸਿਰ ਤਿਲਕ ਕਰੇ ਲਗੂ ਵੀਰ ਉਹ ਤੇ ਬਿਰਿਆਲੀ ਭਲਾ ਦੇ ਰੂਰ ਉਹ ਤੇ ਬਿਰਿਆਲੀ ਵਟਕਾਣੀਆਂ ਬਣ ਆਨੇ ਬਲਨ ਕਿਤੋਂ ਕਿਤੋਂ ਵੀ ਰਿਆ ਕਿਸ ਬੰਦੇ ਤੋਂ ਲਿਆ ਕੁਰਬਾਨੀ ਦੋਲੇ ਗਿਆਨ ਲਿਆ ਤੋ ਲਬ ਲਿਆ ਉਹਨੇ ਰਾਹ ਦਾਸਤਾ ਲਬਲੇ ਹੱਥ ਲਬਣਾ ਦਾਪੇ ਸੰਤਾਪ ਜਾ ਭੁੱਲੀਏ ਜੇ ਕੀਚਨ ਲੱਖ ਉਪਾਵ ਤਾ ਕਹੀ ਨਾ ਕੋਲੀਏ ਜੇ ਤੈਨੂੰ ਭੁੱਲ ਜਾਈਏ ਸਾਰੇ ਦੁੱਖ ਸੰਤਾਪ ਖੜੇ ਹੋ ਜਾਂਦੇ ਨੇ ਤਦੜ ਕਿ ਚੀਨ ਲੱਖੋ ਪਾਪ ਭਾਵੇਂ ਲੱਖੋ ਪਾਪ ਕਰ ਲੀਏ ਉਹਨਾਂ ਦੇ ਦੁੱਖਾਂ ਦੇ ਕਈ ਨਾ ਜਾਂਦੇ ਨਹੀਂ ਆਂ ਦੁੱਖ ਦੂਰ ਨਹੀਂ ਹੁੰਦੇ ਆਂ ਇਹ ਵੱਡੀ ਗੱਲ ਉਹਦਾ ਚਿੱਤ ਇੱਕ ਨਹੀਂ ਕੋਲ ਮਿਲ ਕੇ ਬੈਠੇ ਇੱਕ ਜਗ੍ਹਾ ਜਿੱਦਿ ਸਰਜੀਉ ਪਾਪ ਕਰ ਲੋ ਜਨਾ ਜਿਹੜੇ ਇੱਕ ਜਗ੍ਹਾ ਬੈਠਦੇ ਨਹੀਂ ਖੋਦੇ ਨਹੀਂ ਉਹਨਾਂ ਜਦ ਸਾਰੇ ਸਤਾਬ ਬਣੇ ਹੋਏ ਨੇ ਬਣੇ ਰਹਿੰਦੇ ਨੇ ਹਾਂਜੀ ਸਬੇ दुख संताप ਜਤੁ ਦੂਹ ਭੁੱਲੀ ਐ ਤੁਧੂ ਕੌਣ ਐ ਜੀ ਆਪਣੇ ਮੋੜ ਨੂੰ ਅੱਛਾ ਜੀ ਜੇ ਕੀਚਨ ਲੱਖ ਉਪਾਵ ਤਾਂ ਕਹੀਂ ਨਾ ਕੁੱਲੀ ਐ ਕਿ ਮਨ ਔਰ ਚਿੱਤ ਕੁਲਦੇ ਨਹੀਂ ਮਿਲਦੇ ਨਹੀਂ ਆਪਸ ਹੈ ਜੀ ਰਿਵਾਜ ਨੂੰ ਬਲਦੀ ਕਰਨ ਸਰਦ ਜਿਹਨੂੰ ਲੋਗ ਅਸਰ ਜਾਂਦਾ ਕਾਂਢੀ ਇਹ ਸੱਚ ਕਾਂਢ ਤੋਂ ਕੱਢ ਕੇ ਖੋਟੇ ਕੱਢ ਕੇ ਬਾਹਰ ਮਾਰ ਦੇਣੋ ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੇ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਆਵੇ ਚਿੱਤ ਜਿਹਦੇ ਖਸਮ ਤੇ ਨਹੀਂ ਹੁੰਦਾ ਸੱਚ ਚਿੱਤ ਆਉਂਦਾ ਹੀ ਦੀ ਸੱਚੇ ਟਿਕਦਾ ਹੀ ਨਹੀਂ ਜਿੱਤ ਵਿੱਚ ਇਸ ਚੱਬ ਡੰਡ ਦੇ ਉਹਨਾਂ ਚੱਬ ਦਾ ਡੰਡ ਲੱਗਦਾ ਹੈ ਹੰਕਾਰੀ ਡੰਡਾ ਪਹਿਣਾ ਹੀ ਹੰਕਾਰੀ ਤੇ ਪ੍ਰਹਾਰ ਹੋਣਾ ਹੀ ਹੈ ਕਾਰੀ ਬਹੁਤ ਨੇ ਜਿਹਦੇ ਖਾਦ ਚਿੱਤ ਦੀ ਹੁੰਦਾ ਹੰਕਾਰ ਤੇ ਪ੍ਰਹਾਰ ਹੋਣਾ ਲਾਜ਼ਮੀ ਹੈ ਉਹਦੇ ਡੰਡਾ ਡੰਡਾ ਪੈਣ ਜਿਹੜਾ ਜਿਆਦਾ ਉੱਚਾ ਹੈ ਹਾਂਜੀ ਜਿਸ ਖਸਮ ਆਵੀ ਚਿੱਤ ਰੋਗੀ ਛੇ ਗਣੇ ਆਹ ਬਾ ਰੋਗੀ ਗਣੇ ਜਾਂਦੇ ਕਾਲੀ ਗਣੇ ਦਾ ਕਾਲ ਤੇ ਪਰਹਾਰ ਹੋਣੀਆਂ ਡੰਡਾ ਫੜਣੀ ਠੀਕ ਹੈ ਸੋ ਖਰੋ ਹੰਕਾਰਿਆ ਸੋ ਜਿਨੀ ਨਾਮ ਵਿਸਾਰਿਆ ਆ ਜਿਹਦਾ ਜਿੱਤ ਨਹੀਂ ਉਹਦਾ ਖਰੇ ਹੈ ਖਰੇ ਹੰਕਾਰੀ ਨੇ ਕੋਈ ਉਹਦੇ ਖੋਲਣੀ ਕਾਰ ਦੇ ਵਿੱਚ ਉਹਨਾਂ ਦੇ ਕੋਈ ਕਵੀ ਦੀ ਕਾਰ ਜਿਹ ਖਰੇ ਹੰਕਾਰੀ ਨੇ ਹਰੋ ਘਾਰੀਆਂ ਕੋਈ ਦੁਹੇ ਦਾ ਜੱਗ ਜਿਨ ਨੂੰ ਵਿਸਾਰਿਆ ਦੁਖੀ ਰਹਿੰਦਾ ਸੰਸਾਰ ਵਿੱਚ ਦੀਨਾ ਨੋ ਵਿਸਾਰਤਾ ਜੱਗ ਤੇ ਸਿਹਾਰੀ ਹੈ ਸੋਈ ਦੁਹੇਲਾ ਜੱਗ ਵਿੱਚ ਹੈ ਜੀ ਤਾਂ ਜੱਗ ਵਿੱਚ ਦੁਖੀ ਰਹੂਗਾ ਉਹ ਠੀਕ ਹੈ ਜੀ